ਸੰਘਣਾ ਚਾਲਸ ਤੇਰੇ ਤਰ੍ਹਾਂ ਤੂੰ ਕਿਆ ਲੁਪਟਾਵੇਂ ਮੂਰਖ ਮਨਾ ਆ ਜਿਹੜਾ ਤਾਂ ਮੈਂ ਕਹਿੰਦੇ ਤੇਰੇ ਨਾਲ ਤਾਂ ਜਾਣਾ ਫਿਰ ਤੂੰ ਬੂਰਖ ਬਣਿਆ ਨਾਲ ਤੈਨੂੰ ਪਤਾ ਹੈ ਵੀ ਨਾਲ ਲੋਕਾਂ ਨੂੰ ਕਹਾਣੀਆਂ ਸੁਣਾਉਂਦੇ ਆਪ ਲੁਪਟੇ ਹੋਏ ਇਹ ਤਾਂ ਜੇ ਨਾਲ ਨਹੀਂ ਜਾਂਦਾ ਕਿਉਂ ਲੁਪਟਾਵੇਂ ਮੂਰਖ ਮਨਾ ਕਿਉਂ ਪੈਦਾ ਆਵੇਂ ਮੂਰਖ ਮਨ ਹਾਂ ਜਿਪਟਿਆ ਆਇਆ ਚਾਂ ਕਰੇ ਸਾਧੂ ਹਾਂ ਸੋਤ ਵੀ ਤੇ ਕਟਾਂਬਾ ਰ ਬਣਦਾ ਇਹ ਤੇ ਕਹੂੰ ਤਮ ਦੱਸ ਕਿਹੜਾ ਸਾਥ ਦੇਉਂਦਾ ਇਹ ਵਾਲਾ ਸਾਥ ਚੱਲਣ ਵਾਲਾ ਕੌਣ ਐ ਫਿਰ ਕੋਈ ਨਹੀਂ ਤੇ ਫਿਰ ਪਤਾ ਹੀ ਨਹੀਂ ਲੱਗਣਾ ਉਹ ਕੌਣ ਸੀ ਕੌਣ ਵੀ ਰਾਜ ਰੰਗ ਨਹੀਂ ਹੈ ਕੋਈ ਰਾਜ ਰੰਗ ਮਾਇਆ ਵਿਸਾਰ ਰਾਗ ਰਾਮ ਤੋਂ ਆਇਆ ਵਿਸਾਰਾ ਰਾਗ ਰਾਮ ਤੇ ਬਾਕੀ ਰਾਜਾਂ ਦੇ ਗੋਜ਼ਾਰਿਆਂ ਦੀ ਵੀ ਰਾਜ ਰੰਗਈ ਹੈ ਕੀਰਤਨ ਦਾ ਦਰਾਉਣ ਰੰਗੇ ਹੋਰ ਕੀ ਹੋ ਮਾ ਜਦ ਆਇਆ ਨਾ ਜਦ ਆਇਆ ਤਾਂ ਸਾਰੇ ਉੱਤੇ ਇਸ ਤੇ ਇਹ ਦੇ ਤਾਂ ਝਟਕਾ ਦਾ ਇੰਨੀ ਸੀ ਲਿਖਿਆ ਤੁਸੀਂ ਇਹੀ ਬਣਾ ਕੇ ਰਹਿ ਗਏ ਅਕਲ ਝਟਕਾ ਨਹੀਂ ਦੇਣਾ ਤੁਸੀਂ ਚਾਹੁੰਦੇ ਵੀ ਪਬਲਿਕ ਚੁੱਪ ਜਵੇ ਸਾਰੇ ਨੰਬਰੇ ਬਣਾਇਆ ਵੀ ਪਬਲਿਕ ਨਾਮ ਵੱਲੋਂ ਜਾਏ ਨਾ ਸਕੇ ਕਿ ਕਿਸ ਨੂੰ ਮਿਲੀ ਦੀ ਕੋਈ ਜਦ ਵੀ ਆਹ ਨਾਲ ਇਹ ਗਲਤੀ ਭਾਈ ਵਾਲੀ ਆ ਉਹ ਕਹਿੰਦੇ ਤੁਸੀਂ ਆਪਾਂ ਬਸ ਪਤਾ ਨਾ ਲੱਗ ਜਾ ਲੋਕਾਂ ਨੂੰ ਐਸਾ ਟਾਣਾ ਬਾਣਾ ਘੋਣੋ ਪਤਾ ਲੱਗਣਾ ਜਾਵੇ ਜਾਣ ਕੇ ਨੂੰ ਦੇਣਾ ਆਪਾਂ ਨੇ ਜਾਣਾਂ ਨੇ ਉਹ ਜਾਣ ਦੇਣਾ ਆਪਾਂ ਤਾਂ ਨਲਕਾ ਚਲਾਈਆਂ ਨੇ ਨਾਲ ਚੱਲੇ ਛੱਲ ਹੀ ਇਹਨਾਂ ਆਵੜਾ ਬੜਾ ਫਰੇਮ ਨੇ ਇਲੈਕਸ਼ਨ ਆ ਨਾ ਝੂਠਾ ਦੰਸ ਝੂਠ ਸਹਾਰੀ ਆਜੋ ਰਾਤੋ ਹੋੜੇ ਸਾਥੀ ਰਤ ਅਸਮਾਰੀਆਂ ਨੇ ਜਿਹੜੀਆਂ ਆਈਆਂ ਨੇ ਝੂਠਾ ਡੰਗ ਝੂਠ ਬਸਾਰੀ ਐ ਸਾਡ ਝੂਠਾ ਡੰਗ ਝੂੜ ਦਾ ਬਸਾਰਾ ਸਾਰਾ ਹੀ ਝੂੜ ਪਾ ਸਾਰੀ ਤੇ ਝੂੜ ਦਾ ਸਾਰਾ ਹੈ ਇਹਦੇ ਨਾਲ ਛਡਕਾਰਾ ਨਹੀਂ ਹੈ ਛਡਕਾਰਾ ਇਹਦੇ ਜਿਨੇ ਦਿੱਤੇ ਨੇ ਇਹਨਾਂ ਨੂੰ ਢੋੜੇ ਰਾਜ ਤਿਸ ਨਾ ਤੇ ਗੰਦਸ ਗੰਦਸ ਇਹ ਬੁਆਨਾ ਬਣ ਗਿਆ ਉਹ ਦਾਸ ਹੀ ਬਣਿਆ ਜਿਨੇ ਤਾਂ ਰਹਿਿਆ ਹੀ ਨਹੀਂ ਹੁਣ ਤਾਂ ਇਹ ਇਹ ਇਹ ਕਿਹਨਾਂ ਪੁੱਤ ਨੇ ਕਿਸੇ ਦਾ ਪਾਪ ਹੈ ਕਿਸੇ ਦਾ ਹਾਂ ਉਹ ਨੂੰ ਉਹ ਨੂੰ ਗਾਣਾ ਬਣਾ ਲਿਆ ਬਾਕੀ ਆਪਣੇ ਬਣਾ ਦੇ ਸਾਡੇ ਆਪ ਕਿਸੇ ਦਾ ਬਣ ਗਿਆ ਆਪਣੇ ਕੋਈ ਹੋਰ ਬਣਾ ਲਏ ਜੀ ਸਭ ਕੁਝ ਦਿੱਤਾ ਉਹ ਨੂੰ ਕਿਹਦੇ ਪਿਆਰੀ ਵਿਸਰਿਆ ਬੁਝੇ ਨਾ ਵਿਸਾਰ ਨਾ ਨਿਤ ਨਾ ਨਾ ਸੱਚ ਨੂੰ ਵਿਸਾਰ ਕੇ ਪਸਾਇਆ ਪਸਾਇਆ ਜਿਹੜਾ ਵੀ ਪਸਾਇਆ ਪਸਾਨਾ ਲਿਖਿਆ ਲਫਜ਼ ਜਿਹੜਾ ਵੀ ਸੱਚ ਨੂੰ ਵਿਸਾਰ ਕੇ ਪਸਾਇਆ ਤੂੰ ਵੀ ਪਸਾਨਾ ਤੂੰ ਸਾਚ ਨੂੰ ਬਸਾਰਦਾ ਜਿਹੜਾ ਪਸਾਇਆ ਸੀ ਪੀ ਪਸਾਇਆ ਸਾਚ ਨੂੰ ਬਸਾਰ ਕੇ ਨਾਮ ਨੂੰ ਬਸਾਰ ਕੇ ਪਸਾਇਆ ਹੀ ਹੈ ਉਹਨਾਂ ਇਸ਼ਾਰਾ ਕਰਦਾ ਵੀ ਤੈਂ ਪਸਾ ਉਹਨਾਂ ਨਹੀਂ ਪਸਾਉਣਾ ਤੇਰੀ ਮਰਜ਼ੀ ਆਪ ਜਨ ਹਾਂ